तो मां खराब शराब पिया मारे लिखे मां बाघ माछली خراपाण जो जो प्राणी खाए ते तुम्हारा तो गेम लिया सरदार साथो जा खाए पीए पियाली और खाए कबाब देखो रे लोग वो होते खराब जिनेला पिया बना रहा आंखों बना देते ਸਭਿਲ ਆਜਤਾ ਬਦਲ ਦਿੱਤਾ ਕਾਜੂਗ ਨੂੰ ਨਹੀਂ ਨਹੀਂ ਨਹੀਂ ਕੰਮਿਆਰੇ ਕੰਮ ਸਭਜੂ ਵਰਗੇ ਕਰ ਦਿੱਤੇ ਯਾ ਵੀ ਇਹ ਲਿਖਿਆ ਮਾਏ ਕੇ ਹਰਮਨ ਪਰਮੇਸ਼ਰਾ ਵਿਸ਼ੇਸ਼ਤਾ ਰਖਵਾਏ ਕੇ ਸੇ ਕੰਤ ਨੂੰ ਮੇਰਾ ਨਾਨਾ ਨਾਮ ਰੱਬ ਆਗਿਓ ਸੀਮ ਭੰਗ ਪੁੱਤੁ ਛਿਰਾਵ ਮਾਸ ਚੋਰੀ ਯਾਰੀ ਫੱਗੀ ਡਾਜ ਸਿਯਾਰ ਦੇਵਤਾ ਦੇ ਰਾਖਿ ਕਰਮਾਂ ਨਾਲ ਹੀ ਹੁੰਦਾ ਇਹ ਦੇਦੇ ਆ ਕਰਮ ਕਰੋ ਤੇ ਦੇਵ ਤੇ ਜੀ ਰਾਖਵਾਲੇ ਕਰਮ ਕਰੋ ਤੇ ਰਾਖਿ ਸੇ ਕਮਾਹੇ ਵਿੱਚ ਦੋ ਬੰਦੇ ਬੱਚੇ ਪੈਦਾ ਹੁੰਦੇ ਨੇ ਇੱਕ ਜਿਹੜਾ ਉਹਦਾ ਸ਼ਰਾਨ ਕਰਦਾ ਬਾੜੀ ਪੜਦਾ ਇਹ ਤ੍ਰੇਨ ਕਰਦਾ ਸਤਿਗੁਰੂ ਨੂੰ ਮੰਨਦਾ ਆਇਆ ਗਿਆਨੀ ਸੇਵਾ ਦੇਵਤਾ ਜੰਮੀ ਮੇਰੇ ਵਰਗਾ ਸਿਰੇ ਉੱਜਾ ਨਹੀਂ ਉਠਣਾ ਫਾਰਮਰ ਪਿੱਛੋਂ ਖਾਣਾ ਖਾਲੇ ਨਾਲ ਬਹੁਤਾ ਮਸਰ ਖੋ ਕੇ ਖਾ ਜਾਂਦਾ ਅਜਾਣੇ ਦੇ ਪਹਾੜਾ ਕਰਬਲਾ ਵਾਲਾ ਮਾਦਾਰ ਨਾਲ ਹੈ ਮਾ ਦੀ ਗੁੱਟਪੁੱਟ ਦਾ ਤੇ ਉਹ ਦੀ ਦਾੜੀ ਪੁੱਣ ਦਾ ਲਲ ਲਲ ਤੇ ਲੋਕੀ ਆ ਮੇ ਉਹ ਤਨਾ ਕੋਈ ਹੋਏ ਨਹੀਂ ਪਰ ਕਰਮੇ ਕਿਨੇ ਰਾਖਸ਼ ਹਮਾਰੇ ਤੇ ਉਹ ਤੇਰਾ ਹੀ ਸੀ ਨਾ ਜਵਾਰਾ ਮਨ ਸੀ ਉਹ ਵੀ ਕਿੰਨੂ ਗਾਉਂਦਾ ਪਰ ਤੇ ਰਾਮ ਨੂੰ ਕਿਉਂ ਆਪ ਦੇ ਵਾਸਤੇ ਉਹਦੇ ਕਰਮ ਵਾਸਖੇ ਹੋ ਗਿਆ ਸਨ ਉਹਨਾਂ ਦੇ ਕਰਮ ਦੇ ਕੇ ਵੱਲ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਸਾਰਾ ਸਾਰਾ ਬਿਨਾਂ ਕੋਈ ਕੁਛ ਜਿਹੜੇ ਸਾਰਾ ਵਾਲੇ ਕਰਮ ਕਰਦਾ ਉਹ ਸਾਰੂ ਹੈ ਜਿਹੜੇ ਛੋਟੇ ਕੰਮ ਕਰਦਾ ਉਹ ਤੋਂ ਦਿਨ ਉਹਨਿਆ ਰੱਖੀ ਸੀ ਜਦੋਂ ਕੀਰਤਨ ਨਾ ਜੇ ਜਦੋਂ ਪਹਿਲਾ ਆਉਂਦੇ ਨੇ ਵੇਖਿਆ ਕੀ ਕਰਦੇ ਨੇ ਜੋੜੀ ਲੈ ਕੇ ਨਾ ਜੋੜੀ ਤੇ ਇਹਨਾਂ ਕੋਲ ਹੁੰਦੀ ਉਹ ਤੇ ਇਹਨਾਂ ਕੋਲ ਵਟਾ ਹੁੰਦਾ ਤੇ ਇਹਨਾਂ ਮੁਖਾਂ ਨੇ ਜੋ ਧੋਈ ਰੱਖੀ ਹੋਈ ਹੈ ਨਾਲ ਥੋਰ ਆ ਘੋੜਾ ਹੈ ਨਾ ਥੋਰਣਾ ਨਾ ਹੋਏ ਬਾਜੇ ਨਾਲ ਆਹ ਵਾਹ ਇਹ ਤੋਂ ਹੈ ਥੋਰ ਤੇ ਫਿਰ ਸਾਰੇ ਸੁਣਾਣਾ ਚਾਹੇ ਥੋਰ ਆਵਾਜ਼ ਨਿਕਲ ਦੇਣੇ ਕੈਸੇ ਮੇਰੇ ਮੂੰਹ ਵਿੱਚ ਥੋਰੇ ਹੁੰਦੇ ਇਹ ਦੋਵੇਂ ਵੀ ਥੋਰ ਨਾਲ ਜਾਂਦੇ ਜਦੋਂ ਬਿਖੜਾ ਹੁਣਾ ਨਾ ਹੁਣਾ ਜਦੋਂ ਵੀ ਉੱਡਾਈ ਨਹੀਂਦਾ ਉਹਨੂੰ ਕੌਣ ਤਾਂ ਪਤਾ ਨਹੀਂ ਲਾ ਇਹਨਾਂ ਨੂੰ ਬੜਾ ਹੁੰਦਾ ਮੈਂ ਨਾ ਐਵੇਂ ਕਮਲੇ ਘਾਦੇ ਮੈਂ ਤੇ ਇੱਥੇ ਕਲੇ ਕਿੱਥੇ ਕਿੱਥੇ ਨੂੰ ਮੋੜਨ ਦੇ ਮੈਂ ਲਖਾ ਤਾਂ ਸੁਰੇਆ ਹੋਇਆ ਇਹ ਜਿਉ ਸਰਵਾਇ ਪਾਸੇ ਕਰਦੇ ਨੇ ਉਹ ਦੋਵੇਂ ਵੀਰ ਜਦੋਂ ਕੋਲਦੇ ਨੇ ਫੁਰਜ ਹੋ ਗਏ ਫੇ ਲੋਕੀ ਆ ਗਏ ਤਾਂ ਨਾ ਖੰਗੂ ਪ੍ਰਸਾਦ ਜਿਹਨਾਂ ਨੇ ਜਦੋਂ ਸੁਰਨਾ ਨਾ ਨਾ ਗਾਉਣਾ ਜੀ ਕਾਡਾ ਵੀ ਚੁੱਕ ਕੇ ਥੱਲੇ ਵਾਲੀ ਇਹ ਸਭੀ ਇਹ ਫੁਰਉਂਦਾ ਹੈ ਕਾ ਹੋੜ ਜਣਾ ਹਦਾਵ ਨੂੰ ਤੇਰ ਤੱਕ ਜਿਹਨੇ ਨੂੰ ਮੱਥੇ ਦੇ ਕੇ ਹੱਥ ਹੋ ਜਣਾ ਰਾਕਸ਼ ਫੋਗਰਿਆ ਕੋ ਨੂੰ ਲੋਕੀ ਜੋਗੀ ਕਾਤੇ ਰੋ ਪਤਾ ਉਹ ਹੋੜ ਜਣਾ ਜਿਹੜਾ ਰਾਕਸ਼ ਹੈ ਉਹ ਦੇਾਰੇ ਕਰਦਾ ਸਾਧਨਾ ਕਿਦਾਂ ਨੋ ਜਾਂ ਕਿਤੀ ਪੱਗ ਬੰਨ ਕੇ ਤੇ ਮਾਰਾ ਪਾ ਲੈਣੀ ਜਾਂ ਭੰਗਲੇ ਕਪੜੇ ਪਾ ਕੇ ਤੇ ਮਾਰਾ ਪਾ ਲੈਣੀ ਜਾਂ ਕੱਜ ਪਾ ਲੈਣੀ ਜਾਂ ਝੋਟੀ ਪਾ ਲੈਣੀ ਤੇ ਇਹ ਨਾਲ ਸਾਰ ਗੋਰੀ ਤੇ ਨਹੀਂ ਜੇ ਇਹ ਪਾਟੇ ਅਦਾਸ ਨਾਲ ਇਹ ਵੀ ਫਿਰ ਆ ਜਾਣਿਆ ਨੇ ਨਾਨਕ ਆਖੇ ਰੁਪਿੰਦੀ ਜਿਹੜੇ ਗੁਰੂ ਨਾਨਕ ਸਾਹਿਬ ਦੇ ਮਾਰਗ ਉੱਤੇ ਜਾਗ ਰਿਹਾ ਹੈ। ਸਿੱਧਰਗਾ ਦੇ ਵਿੱਚ ਅੰਦਰ ਜਾ ਕੇ ਨਾ ਸਿੰਧੂ ਨੂੰ ਤੇ ਨਾ ਮੁਸਲਮਾਨ ਨੂੰ ਕੋਈ ਮਿਲੇਗੀ। ਉੱਥੇ ਜਾ ਕੇ ਉਹ ਦੇ ਕਰਵਾ ਨੂੰ ਅਵਸ਼ਯਵੇਂ ਤੁਸੀਂ ਕੱਢੇ ਸਿੱਧਾ ਕਰਮ ਇਹ ਹੋਰ ਹਾਰ ਹਾਰਨ ਗਿਆ ਸਾਬਨਾ ਸਾਡੇ ਨੂੰ ਕਹਿੰਦੇ ਨੇ ਨਿਰਮਲਤਾ ਕੇ ਕਰਾਂ ਜਿਤੇ ਕਰਮ ਨਿਰਮਲ ਆ ਰੋਸੂ ਆਦਾ ਤਾਂ ਮੇਰਾ ਬਾਪ ਤੇ ਸ਼ਰਾਬ ਨਹੀਂ ਮੈਂ ਖੱਦੀ ਨਾ ਮਾਸ ਨਹੀਂ ਖਾਣਾ ਉਹ ਜਿਹੜਾ ਸਮਝੋ ਪੱਕਰਾ ਉਸਨੇ ਮੈਂ ਮੈਂ ਜਿੰਦੀ ਤੇ ਉਹਦੀ ਗਰਦਨ ਤੇ ਛੁਰੀ ਆ ਗਈ ਕੋਈ ਖਾਣ ਵਾਲਾ ਖਾ ਲਿਆ ਉਹ ਛੁੱਟ ਛੜਿਆ ਬਾਕੀ ਤਾਂ ਤਾਂ ਰਹਿ ਗਈਆਂ ਤਾਂ ਤਾਂ ਲਾਗ ਜਾ ਦੋਖ ਨੇ ਰੂਪੇ ਨੇ ਤਾੜਾ ਬਣਾ ਲਿਆ ਤਾੜਾ ਬਣਾ ਕੇ ਰੂਪ ਪੀਣ ਲੱਗਾ ਜਦੋਂ ਰੂਪ ਪੀਣ ਲਗਾ ਤੇ ਲੱਕੜ ਦਾ ਮੋਦੋਨਾ ਤਾਰ ਦੇ ਮਾਰਦਾ ਨਾ ਆਵਾਜ਼ ਆਉਂਦੀ ਸੀ ਉੱਥੇ ਤੂੰ ਪਰ ਤੂੰ ਤੂੰ ਆਖਦੋ ਕਿ ਠੀਕ ਆ ਜਾਣਾ ਠੀਕ ਹੈ ਤੂੰ ਤੁਮੇ ਨਾ ਆ ਕੋਲੇ ਬੱਤੈ ਟੋਨ ਯਾਰ ਪਿਆਰੇ ਜੀ ਇੱਥੇ ਦੇਖੋ ਪੈਸੇ ਦਾ ਨਾਮ ਲੈ ਕੇ ਕੰਨ ਕਿਸੇ ਨੂੰ ਫਲੇਮ ਦਿੱਤਾ ਇੱਥੇ ਦੇਖੋ ਸਾਉਗਾ ਦਾ ਸੱਜਣਾ ਦਾਰਿਆਂ ਨੇ ਸਿਆਰਿਆਂ ਦਾ ਕੰਮ ਹੈ ਇੱਕ ਪੰਕਤੀ ਲਾ ਕੇ ਨਾ ਐਸੀ ਤਰ੍ਹਾਂ ਤੇ ਕਰਿਆ ਕਰਦਾ ਜੀ ਸਾਉਗਾ ਉਹਦਾ ਇਹ ਸੂਤ ਸੀ ਕਿ ਜਿਹੜਾ ਅਨਾ ਹੋ ਕੇ ਸੰਗਤੀ ਵਿੱਚੋਂ ਦਾਣ ਮੰਗਦਾ ਸੀ ਉਹਨੂੰ ਦਾਣ ਨਹੀਂ ਸੀ ਲਾਈ ਲਿਖੀ ਹੋਈ ਹੈ ਤੇ ਮੇਰੇ ਵਰਗਾ ਬੇਸ ਫਰਮ ਮੰਗਦਾ ਹੋਵੇ ਤੇ ਆ ਕਰਦਾ ਹੈ ਸਪੈਸ਼ਲ ਕਰਦਾ ਦੇਖਿਆ ਵੀ ਇਹ ਇਹ ਇਹ ਦਾਤੇ ਖਾਂਦੇ ਅੱਜ 5:00 ਬੰਦਿਆਂ ਵੇਲੇ ਜਿਹਨੇ ਦਾਣ ਕਰਕੇ ਤੇ ਤੇਰੇ ਮੂਹੇ ਕਿਹਦੇ ਅੱਗੇ ਦੇ ਦੇ ਇਹ 15-15 ਮਿੰਟਾਂ ਦਾ ਕਰ ਕਰੇ ਤੇ ਬੜਾ ਥਿਰ ਲਾਏਗਾ ਉਹ ਮੰਗਤਾ ਤਾਂ ਤੇ ਦੇ ਹਾਂ ਦਾਣ ਮੈਂ ਤੇ ਤੂੰ ਇਹਨਾਂ ਘੰਟੇ ਗੱਲਾਂ ਕਰਦੇ ਛਾਉ ਕਰ ਤੈਨੂੰ ਮੈਂ ਦਾਣ ਦੇਣਾ ਅਸੀਂ ਕਿਉਂ ਅੱਜ ਮੇਰਾ ਇਹ ਬਣਾਇਆ ਤੇ ਜਿਹੜਾ ਅਗਾਂਹ ਬੇਸਬਰ ਹੋ ਕੇ ਮੰਗਦਾ ਉਹ ਮੈਂ ਜਦੋਂ ਮੈਂ ਤਾਂ ਲੈਣਾ ਉਹ ਤਾਂ ਮੈਂ ਦੇਣਾ ਨਹੀਂ ਮੰਗੇ ਦੀ ਤੇ ਦਾਦੇ ਦੀ ਤੇ ਹੋ ਗਈ ਆ ਹੋਰ ਮੰਗਤਾ ਕਦੇ ਕੋਈ ਰੂਪਕਾਰ ਕੇ ਆਉਣਾ ਲੈਂਦਾ ਮੈਂ ਪੰਗਰ ਤੋਂ ਬਾਹਰ ਕੀਤਾ ਫਾਜਿਆ ਕੋਈ ਸ਼ਫੇਰ ਜਦੋਂ ਉਹਨੇ ਦੇਖਿਆ ਵੀ ਫਾਜਿਆ ਕੋਈ ਸ਼ਫੇਰ ਹੋਈ ਜਣੇ ਆਂਦਾ ਹਰ ਚੇ ਚੋਂ ਬੰਦੇ ਨੂੰ ਅਰਜ਼ੀ ਕੀਤੀ ਅਜ਼ਮ ਖਾ ਮੇਰੀਆ ਵੀਰਾਂ ਆਹ ਮੈਨੂੰ ਕਿਉਂ ਦੇ ਨੂੰ ਮਰਦਾ ਬਣਾਉ ਲੋ ਕਿਉਂ ਦੇ ਤੇ ਮਰਦਾ ਬਣਾ ਕੇ ਤੇ ਬਜਾਰੇ ਲੈ ਕੇ ਲੋ ਜਿਹਨੇ ਗੱਲ ਕੀਤੀ ਸੋਦੀ ਗੱਲ ਪਾਣੀ ਜਾਓ ਤੇ ਉਹਨਾਂ ਮਾਦਲੇ ਉਹ ਦੋ ਦਿਨ ਪਹਿਲਾਂ ਅਦਾਦੀ ਕੋਲ ਚਲਾ ਗਿਆ ਅਦਾਦੀ ਮੰਗਾ ਕਿ ਮੈਨੂੰ ਕਫਨ ਦੇ ਦੇ ਖਫਣ ਜਿਉਂ ਦੇ ਅਕੇ ਡਾਕਾ ਮਾਇਆ ਕਿ ਇਹੇ ਦੀ ਕੰਮ ਹੈ ਕਿ ਇਹਨੇ ਤੇ ਨਹੀਂ ਕੀ ਮੈਂ ਤਾਂ ਕਾਜ ਤੋਂ ਤਾਂ ਪਰ ਕਫਨ ਦਵਾ ਤੁਹਾਨੂੰ ਦੋਈ ਦੇ ਪੈਸੇ ਦੇਣਾ ਜਿਹਨੂੰ ਕਿਨਾ ਕੁਝ ਸਵਾਹ ਹੋਈ ਨਾਲ ਪਵਾ ਖਫਨ ਪਵਾ ਰਿਹਾ ਪਹਰ ਪਾਲਿਆ ਤੇ ਚੋ ਭਰਾਵਾਂ ਨੂੰ ਆਖਿਆ ਮੈਨੂੰ ਲੈ ਚਲੋ ਤੇ ਉਹਨਾਂ ਨੇ ਜਿਵੇਂ ਮਰਦਾ ਚੁੱਕ ਰਿਹਾ ਤੇ ਬਜਾਰੇ ਬਾਹਰ ਗਾ ਰਾਮਨਾਮ ਸਤ ਹੈ ਸਭਨ ਜਿਹੜੇ ਮੁਰਦਾ ਆਉਂਦੇ ਨੇ ਆਪੋ ਜਿਹੜਾ ਸਾਹਮਣੇ ਪਾਸੇ ਜੋ ਬੰਦੇ ਉਹ ਸਭ ਕਾਰ ਕਰਦਾ ਜਿਹੜਾ দান ਕਰਦਾ ਸਭ ਤੋਂ ਮੈਂ ਦੇਖਿਆ ਕਿ ਨੇ ਕੋਈ ਅਜਿਹਾ ਨੇ ਕਿੱਥੇ ਮਰਨਾ ਤੇ ਮੈਨੂੰ ਵੀ ਕੋਈ ਇੱਥੇ ਤਰ੍ਹਾਂ ਮੁਰਦੇ ਵਾਸਤੇ ਖਫਨ ਦੇ ਚਲੇਗਾ ਹੋਵੇ ਨਾ ਇਹਨਾਂ ਜਿਹੜੇ ਖਫਨ ਦੇ ਪਾਸੇ ਦਿੱਤੇ ਨੇ ਮੈਂ ਉਹਨਾਂ ਦੇ ਦਿਆਂ ਦੇ ਇੱਕ ਜਾ ਕੇ ਆਪੋ ਜਮਾਨ ਲੈ ਤਾਬੂ ਆਲਾ ਜਾਰ ਸੁਦਾ ਹੋਆ ਮੁਰਦਾ ਮੁਰਦਾ ਤਰੇ ਆਉਂਦਾ ਲੈ ਨਹੀਂ ਚਾਹੀਦਾ ਜੰਦਾ ਫੇਰਾਂ ਨਹੀਂ ਤੇ ਪੈਸੇ ਦੇ ਮੁਰਦੇ ਉੱਤੇ ਫੁੱਲ ਉੱਥੇ ਜਾ ਕੇ ਆਪੇ ਵੰਡ ਲੈਣਗੇ ਉਸਨੇ ਗੋਜੇ ਦਾ ਪਾਇਆ ਦੇ ਲੋਡ ਨਹੀਂ ਹਣ ਉਹ ਤਾਂ ਹੁੰਦੇ ਦੇਖਾ ਜੇ ਪਹਿਲਾਂ بڑے ਆ ਗਿਆ ਫਿਰ ਕਿਹਦਾਿੱਦੀ ਉਹ ਮਿੰਟ ਹੁੰਦੇ ਦੇ ਕੋਈ ਕੁਹਾੜ ਹੋਏ ਚਲੇ ਦੀ ਮੁੱਠ ਤੇ ਮੁਰਦੇ ਉੱਤੇ ਹੁਣ ਜਦੋਂ ਮੁਰਦੇ ਉੱਤੇ ਚੁਟੀਆਂ ਹੋਇਆ ਖੜਾਕਾ ਹੋਇਆ जो खडाका होया ना भगवान ने थी कोना बनायो तो वो तैयार पया लस्सी की क्या आया थी और मामा प्रमिस थी वो वो दोनों उसके बदार तो फौरन उसने हाथ कफनी से निकाला फटाफट अस्पताल ले आप सोईओ और तो ये खड़ला ਨੇਕਦਰ ਬੋਲਾ ਅਰੇ ਬਾਲਾ ਹਮਮ ਦੇਖ ਮੁਝ ਕਾ ਵੀ ਮੇਰਾ ਤੇਰਾ ਫਾਇਦੇ ਕਰਨ ਜਿਦਾਂ ਤੂੰ ਮੈਨ ਦਾ ਹਟਾ ਨੀ ਦੇਣਾ ਲੈ ਆਏ ਕਿ ਨੀ ਦਾਨ ਸੋਹ ਪਾ ਕੇ ਦਾ ਅੱਜ ਵੀ ਆ ਜੂ ਅੱਜ ਬੰਦੇ ਨੂੰ ਮੁੰਦੇ ਹੀ ਗੱਲ ਕਰਦਾ ਇਹ ਜਗਾ ਕੋਲ ਮੜੀ ਹੋਈ ਜਣਦੀ ਇੱਥੇ ਅਸਲੀ ਆਈ ਇੱਥੇ ਮਜ਼ੇ ਹੀ ਹੁੰਨ ਲੱਗਦਾ ਤੇਰਾ ਨਾਮ ਇਹ ਗੱਲ ਹੋ ਗਿਆ ਉਹਨਾਂ ਕਾ ਸਰਾਜ ਕਾਉ ਕਰਦਾ ਹਾਂ ਜੇ ਕਿ ਨਹੀਂ साथ वाले करे अगनु बोला ठीक है हां ठीक शाह बोला साथ वाले करे मर लिया जब तक ना पाया तू ने सु बचू दान दे पर मर के भी आई समरे मौत चला तू हाल यही बात पर दे के मुझे का वा वो बस लिखिया तो प्रेम के का जाओ फिर काल काली गली मर आए मार ਈਗਾ ਫਿਰ ਵੀ ਜਾ ਗਾਨ ਲੱਗ ਜਾ ਪਹਿਲਾ ਮਰਤਬੂਲ ਜੀਵਨ ਕੀ ਖੜਾਤ ਹੋ ਸਬਰ ਕੀ ਰੇਤਾ ਤੋ ਆਓ ਹਮਾਰੇ ਸਾਥ ਮਰਦੇ ਹੋਏ ਅਮਰੀਕਾ ਗੁਰਗੋਰ ਸੁਬਾਈ ਇਹ ਬਗੈਰ ਦੇਵ ਤੇ ਫੜ ਇੱਕ ਪਦ ਮੈਂ ਪੜਾਂਗਾ ਇੱਕ ਪਦ ਮੇਰੇ ਪੜ ਇੱਕ ਪਦ ਤਾਂ ਮੈਂ ਕਹਿਆ ਆਪੀ ਕਰ ਬਾਪ RAM ਨੂੰ ਹਟਾ ਜਦ ਮੰਗੀਤਾ ਹਾ ਖਦੀ ਦਵਨਾ ਆਪੜੇ ਪਤਾ ਵੀ ਤੋ ਹੋ ਕੇ ਰਾਜ ਬਾਲ ਦੇ ਦਾਨ ਕੀਤਾ ਤੇ ਪਤਾ ਚ ਗਿਆ ਖਦੀ ਹੈ ਅੱਤ ਦਾ ਦਰਦ ਦਾ ਹਿਮੇਸ਼ਾ ਰਹਿ ਰਿਹਾ ਕਰਦਾ ਜਦੋਂ ਦੁਨੀਆਂ ਤੇ ਅੱਤ ਹੋ ਦੇਖ ਕੇ ਪਾਪੀਂਆਂ ਦੇ ਦੇ ਬਾਦਸ਼ਾਹ ਬਾਰ ਬਾਰ ਆਣ ਕੇ ਦੁਨੀਆਂ ਤੇ ਆ ਕੇ ਉਹਨੇ ਦੁਨੀਆਂ ਦਾ ਫੇਰ ਪਾਲ ਉਤਾਰਾ ਕੀਤਾ ਅੱਜ ਵੀ ਇਹ ਕਦੇ ਕੋਈ ਨਾ ਚੰਗੀ ਸੀ ਮਿਹਰਬਾਨ ਹੁੰਦੀ ਪਤਾ ਨਹੀਂ ਹੁੰਦਾ ਤੁਹਾਡਾ ਜੇ ਜੇ ਪਾਸ ਤੋਂ ਗ੍ਰੀਵੇਤ ਨੂੰ ਕਦਾ ਤੇ ਜਾਂ ਮੈਨੂੰ ਪਤਾ ਵੀ ਉਹ ਕੀ ਹੁੰਦਾ ਜਾਂ ਸੱਚੇ ਪਾਸ ਜਾਣ ਪਤਾ। ਉਹ ਲੜਕਾ ਨਹੀਂ ਖਤਮ ਕਰਨਾ ਜ਼ਰੂਰ ਕਰਦਾ ਜੇ ਮੈਂ ਅੱਜ ਕਰ ਸੀ ਹੁਣ ਜਦੋਂ ਸੱਜਾ ਹੋ ਗਿਆ ਕਿਹਾ ਵੀ ਜਵਾਨ ਕੱਲ ਦਾ ਇਹ ਮੈਂ ਨਹੀਂ ਕਰਦਾ ਤੇ ਉਹ ਫਿਰ ਕੰਨ ਨੂੰ ਦਰਸ਼ਨ ਦਿਓ ਤੇ ਮੇਰੇ ਸਾਹਮਣੇ ਕਰੋ ਇਸ ਸ਼ਰਤਾਂ ਦੀ ਕਥਾ ਕਰੋ ਤੇ ਰਾਹਨੀਆਂ ਦਾ ਕੀ ਤੋਂ ਸੁਣੋ ਤੇ ਜੇ ਬਚਨ ਮੈਨੂੰ ਮਿਲਿਆ ਤੇ ਮੈਂ ਵੀ ਅਗਲਾ ਲਾਹਨੀਆਂ ਕਾਰ ਤੋਂ ਅੰਕਲ ਨੂੰ ਨਾ ਵਾਗਾ ਲਾਹਨੀਆਂ